ਸਰਬਸਤਕਾਰਯੋਗ ਸਤਿਗੁਰੂ ਜੀ ਦੀ ਸਾਜੀ ਹੋਈ ਸਾਧ ਸੰਗਤ ਮਨ ਬਿਰਤੀ ਕਾ ਕਰਨ ਲਈ ਰਸਨਾ ਪਿੱਤਰ ਕਰਨ ਲਈ ਇੱਕ ਰੰਸਾਰੇ ਕਉ ਧੰਨ ਸ੍ਰੀ ਸਤਗੁਰੂ ਆਰਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਰੰ ਫੇਰ ਕਹੋ ਧੰਨ ਸ੍ਰੀ ਸਤਗੁਰੂ ਜੀ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਂ ਸਧੁਰੂ ਜੀ ਜੀ ਜੀ ਸਿੰਘ ਜੀ ਦੇ ਮੈਂ ਦਰਸ਼ਨ ਕਰਕੇ ਆਇਆ 8 ਤਰੀਕ ਨੂੰ ਪਹਿਲਾਂ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਅਰਜ਼ੀ ਕੀਤੀ ਇੱਕ ਮਹੀਨਾ ਪਹਿਲਾਂ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੋਵੇ ਤੁਹਾਡੀ ਕਿਰਪਾ ਦੇ ਨਾਲ ਬੱਚਾ ਹੋਵੇ ਯੂਕੇ ਕੱਲਿਆ ਪੜਨ ਵਾਸਤੇ ਤੁਹਾਡਾ ਹੁਕਮ ਹੋਇਆ ਤਾਂ ਮੈਂ ਉਹਦੇ ਉਹਨੂੰ ਮਿਲਿਆ ਵਾ ਸੱਚੇ ਪਾਤਸ਼ਾਹ ਸ਼ਾਮ ਦਿਨ ਇਤਨੇਪ ਚੋਂ ਗਿਆ ਤੇ ਮੈਂ ਵੀ ਪਿੱਛੇ ਕੋਠੀ ਦੇ ਵਿੱਚ ਚਲੇ ਗਿਆ ਮੈਨੂੰ ਆਪਣੇ ਇੰਤਜ਼ਾਰ ਕਰਦਿਆਂ 2 ਘੰਟੇ ਲੱਗੇ ਸੱਚੇ ਪਾਤਸ਼ਾਹ ਜੀ ਦੇ ਮੈਂ ਆਸਾਂ ਮੇਰੀ ਮਿਸੇ ਸਨ ਮੇਰੀ ਬੇਟੀ ਸੀ ਮੇਰਾ ਬੇਟਾ ਸੀ ਛੋਟਾ ਗਰੀਬ ਨੂੰ ਅੱਜ ਫਿਰ ਆਏ ਬਾਹਰ ਉਹ ਸ਼ਾਮ ਨੂੰ ਫਿਰ ਕ੍ਰਿਕਟਰ ਵਾਲੀਵਾਲ ਜੋ ਵੀ ਉੱਥੇ ਸਾਸਨ ਖੇਡਦੀ ਸੱਚੇ ਪਾਤਸ਼ਾਹ ਜੀ ਉੱਥੇ ਦਰਸ਼ਨ ਦਿੰਦੇ ਨੇ ਬਾਰੇ ਗਰੀਬ نواز ਜੀ ਸੱਚੇ ਪਾਤਸ਼ਾਹੇ ਫਿਰ ਮੈਂ ਅਰਜ਼ ਕੀਤੀ ਗਰੀਬ نواز ਜੀ ਦਾ ਮੈਨੂੰ ਹੁਕਮ ਹੋਇਆ ਕਹਿੰਦੇ ਜਾਇਆ ਥੋੜੀ ਬਾਅਦ ਫਿਰ ਮੈਂ ਕਾਜੀ ਭਲਾਈ ਕਰ ਦਿੱਤੇ ਵੀਜ਼ਾ ਲੱਗ ਗਿਆ ਮੇਰਾ 8 ਤਰੀਕ ਨੂੰ ਫਿਰ ਅਸੀਂ सचे ਪਾਤਸ਼ਾਹ जी ਦੇ ਦਰਸ਼ਨ ਕਰਨ ਚਲੇ ਗਿਆ 9 ਤਰੀਕ ਦੀ ਮੇਰੀ ਫਲਾਈਟ ਸੀ ਮੈਂ ਗਰੀਬੰਗਵਾਦ ਜੀ ਕੋ ਆਸਾਦੀਵਾਰ ਦੇ ਵਿੱਚ ਪਹੁੰਚ ਗਿਆ ਅਮਰਤ ਵਲੇ ਸੱਚੇ ਪਾਤਸ਼ਾਹ ਜੀ ਸੁਸ਼ੋਭਿਤ ਸਨ ਆਸਾਦੀਵਾਰ ਜੀ ਦੇ ਵਿੱਚ ਭੋਗ ਪਿਆ ਭੋਗ ਉਪਰੰਤ ਫਿਰ ਮੈਂ ਸੱਚੇ ਪਾਤਸ਼ਾਹ ਜੀ ਰਿਸ਼ਪਾਲ ਜੀ ਨੇ ਕਿਹਾ ਰਿਸ਼ਪਾਲ ਜੀ ਨੇ ਸਾਰੀ ਗਲਤੀ ਸੱਚੇ ਪਾਤਸ਼ਾਹ ਜੀ ਨੂੰ ਸੱਚੇ ਪਾਤਸ਼ਾਹ ਜੀ ਮੈਂ ਗਰੀਬਨਵਾਰ ਤੁਹਾਡੀ ਹੁਕਮ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਵੀਜ਼ਾ ਲੱਗ ਗਿਆ ਆ ਤੇ ਤੁਹਾਡਾ ਹੁਕਮ ਹੋਏ ਫਿਰ ਫਿਰ ਰਿਸ਼ਪਾਲ ਜੀ ਨੇ ਕਿਹਾ ਹਾਂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਆ ਤੇ ਜਾਓ ਫਿਰ ਮੈਂ ਸੱਚੇ ਪਾਸ਼ਾ ਜੀ ਤੁਹਾਡਾ ਹੁਕਮ ਹੋਏ ਤੇ ਕੋਈ ਸ਼ਬਦ ਪੜ ਸਕਦਾ ਮੈਂ ਉਸ ਗਰੀਬ ਨਵਾਜ਼ ਤੁਹਾਡਾ ਹੁਕਮ ਹੋਏ ਦਾ ਫਿਰ ਸੱਚੇ ਬਾਸ਼ਾ ਮੁਸਕਰਾਵੇ ਫਿਰ ਹੱਸਵੇ ਫਿਰ ਖੁਸ਼ੀਆਂ ਦੇ ਦੀਆਂ ਸੱਚੇ ਬਾਸ਼ਾ ਜੀ ਨੇ ਕਹਿੰਦੇ ਪੜੋ ਤੇ ਇਹਨਾਂ ਕਰਕੇ ਫਿਰ ਮੈਂ ਨਮਸ ਕਰਕੇ ਸੱਚੇ ਬਾਸ਼ਾ ਜੀ ਦੇ ਕੋਲ ਫਿਰ ਮੈਂ ਆ ਲਈ ਤੇ 9 ਤਰੀਕ ਨੂੰ ਫਿਰ ਮੈਂ ਫਲਾਈਟ ਫੜ ਕੇ ਇਧਰ ਸੱਚੇ ਬਾਸ਼ਾ ਜੀ ਕਿਰਪਾ ਦੇ ਨਾਲ ਇਹ ਆ ਗਿਆ ਧੰ ਸਤਿਗੁਰੂ ਜੀ ਜੀ ਸੱਚੇ ਬਾਸ਼ਾ ਜਿਨ੍ਹਾਂ ਦਾ ਕੋਈ ਸਿੰਦੇ ਨਹੀਂ ਦੇ ਸਕਦੇ ਸੋ ਇੱਕ ਵਾਰ ਫਿਰ ਸਾਨੂੰ ਪ੍ਰਤਤਰ ਕਰੋ ਗੱਜਕੇ ਕਾਉ ਤਨ ਸ੍ਰੀ ਸਤਗੁਰੂ ਜੀ ਜੀ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਧੰਨਵਾਦ ਸਤ ਸ੍ਰੀ ਅਕਾਲ